श्लोक मोहल्ला तीसरा गुरुमुखी ज्ञान विवेक बुद्धि होए गुण गावे हृदय हार देखो विवेक बुद्धि ना गुरु के ज्ञान जोड़ता ऐदो हुन की कर गल दे गुरु विवेक है यदि गुरुमुखी बुद्धि या विवेक बुद्धि या, भुदी या ਭਵੇ ਕਰਮ ਬਵੇਕ ਬੁੱਧੀ ਚ ਕੀ ਫਰਕ ਹੈ ਉਹ ਦਾ ਨਾਮ ਥੀਂ ਦਾ ਨਾਮ ਲੱਗਦਾ ਉਹੀ ਚੀਜ਼ ਹੈ ਇੱਕੋ ਹੀ ਚੀਜ਼ ਹੈ ਦੋ ਦੂਦੇ ਕਿ ਜੇਰਾ ਕਾਲੀ ਜੀਜੋ ਹੈ ਤਾਂ ਬੁੱਧੀ ਹੈ ਬਵੇਕ ਬੁੱਧੀ ਹੈ ਫੇ ਤਾਂਤਾ ਬਵੇਕ ਤਾਂ ਕਬੀਰ ਮੈਂ ਐਸੋ ਗੁਰ ਪਾਇਓ ਜਾ ਹੋ ਗਿਆ ਮੈਂ ਇੱਕ ਬੁੱਧੀ ਚੰਡੀ ਹੋ होगी ਮਾਤਾ ਹੋ ਵੀ ਜਗ ਮਾਤ ਪ੍ਰਤਾਪ ਵਾਹਦੇ ਸੁਰਤਾਪ ਇੰਨੀ ਹੀ ਗੱਲ ਹੈ ਇੱਥੇ ਵੀ ਆ ਗਈ ਆ ਦੇ ਵਿੱਚ ਇਹ ਤਾਂ ਅੱਧੀ ਵਾਲੀ गुण ਹੈ ਇੱਥੋਂ हार ਸਭ ਆ ਨਿਕਲਦਾ ਰਹਿੰਦੇ ਚੋ ਜਿਵੇਂ ਹਾਰ ਨਿਕਲਦਾ ਨਾ ਫੇਰ ਟਿਕੜੀ ਜਾਂਦਾ ਹੈ ਹਾਰ ਸੁਧਿਆ ਹੋਇਆ ਰੰਗ ਬਰੰਗੇ ਰੰਗ ਬਰੰਗੀਆਂ ਉਹਦੇ ਦਿੱਤੀਆਂ ਹੁੰਦੀਆਂ ਜਿਵੇਂ ਆਪਾਂ ਮਸਾਲਾਂ ਦੁਨੀਆਬੀ ਦਿੰਦੇ ਆ ਨਾ ਜਿਹੜੀਆਂ ਮਸਾਲਾਂ ਦੁਨੀਆਬੀ ਮਸਾਲਾਂ ਦਿੰਦੇ ਸਮਝਾਉਂਦੇ ਉਹ ਰੰਗ ਬਰੰਗੇ ਫੁੱਲ ਪਾਏ ਹੁੰਦੇ ਨੇ ਹਾਰ ਪਰੋਏ ਹੁੰਦੇ ਨੇ ਇਕੋ ਰੰਗ ਦੇ ਮਣਕਿਆਂ ਦੇ ਵਿੱਚ ਜੇ ਦੂਏ ਰੰਗ ਦਾ ਆ ਜਾਂਦਾ ਨਾ ਫੁੱਲ ਇਕੋ ਰੰਗ ਦੇ ਫੁੱਲਾਂ 'ਚ ਫਿਰ ਛਾਂ ਬਣ ਜਾਂਦੀ ਗੁਰਬਾਣੀ ਦੀਆਂ ਕਪਤਾ ਹਾਰ ਪਰੋ ਕੇ ਨਿਕਲਦੇ ਪਵਿੱਤ ਪਾਵਨ ਪਰਮ ਵਿਚਾਰੀ ਜੇ ਉਸ ਮਿਲੈ ਤਿਸ ਪਾਰ ਅਗਲੀ ਤੇਜ ਪਾਵਤ ਪਵਿੱਤਤਾ ਦੀ ਤੀਜੀ ਤੇਜ ਪਾਵਨ ਪਰਮ ਤੀਜੀ ਫਰਮਾਗੀ ਪਰਮ ਵਿਚਾਰੀ ਵਿਚਾਰ ਐਸੀ ਹੈ ਜਿੱਥੋਂ ਉੱਤੇ ਵਿਚਾਰ ਨਹੀਂ ਹੋ ਸਕਦਾ ਪਰਮ ਵਿਚਾਰ ਉਹ ਹੈ ਜਿਹਦੇ ਉੱਪਰ ਵਿਚਾਰ ਨਹੀਂ ਹੋ ਸਕਦਾ ਉਹ ਵੀ ਤਪਾਵਨ ਕੱਢ ਲੈਣਾ ਪਰਮ ਵਿਚਾਰੀ ਜੇ ਉਸ ਮਿਲੈ ਜੇ ਉਸ ਮਿਲੈ ਜੇ ਉਸ ਮਿਲ ਜਵੇ ਨਾ ਵਖਣ ਪਾਰ ਉਤਰ ਉੱਤਰ ਜਾਂਦਾ ਕੌਣ ਜਿਹੜਾ ਵਿਚਾਰਦਾ ਉਹੀ ਉੱਤਰਦਾ ਜੁਆਦੀ ਉੱਤਰਦਾ ਇਹ ਨਹੀਂ ਹੈਗਾ ਵੀ ਮੱਖਣ ਵਿਚਾਰਿਆ ਮਾਇਆ ਦੇਦਾ ਆਂ ਜਿਹਨੂੰ ਬੁਲਾਇਆ ਤੈਨੂੰ ਖਾਇਆ ਅਬਰ ਬੁਲੋ ਬਣ ਹਾਰ ਆਪੇ ਬਲੋ ਆਪੇ ਖਾਉ ਆਪੇ ਪਰ ਉਤਰੂ ਸ਼ਰਤ ਹੈ ਤਾਂ ਫੈਕਟਰੀਆਂ ਲੱਗ ਜਾਂਦੀਆਂ ਜਵਾਲ ਵਰਗੇ ਫੈਕਟਰੀਆਂ ਲਾਉਂਦੇ ਮੱਖਣ ਦੀਆਂ ਚਲੋ ਭਈ ਪਾਰ ਪੜਾ ਪੜਾ ਉੜਵੀ ਲਾਈਆਂ ਵਿਆਹ ਨੇ ਫਕਤੀਆਂ ਤਾਂ ਹੁਣ ਵੀ ਨਾ ਲਾਈਆਂ ਹੋਈਆਂ ਕਹਿੰਦਾ ਨਹੀਂ ਸਾਡਾ ਗੁਰੂ ਦਾ ਬਾਹ ਮੜ ਕੇ ਲੈ ਜਾਂਦਾ ਸਾਰੇ ਕਹਿੰਦੇ ਸਾਡਾ ਸਭੀ ਮੈਂ ਕਹਾਂ ਵੀ ਉਹ ਬਾਹ ਲੈ ਗਿਆ ਸੀ ਆਪਣੀ ਨਾਲ ਜਿਹੜੀ ਉਹਦੀ ਬਾਹ ਸੀ ਉਹ ਨਾਲ ਲੈ ਗਿਆ ਸੀ ਅਖੇ ਨਹੀਂ ਫਲੂਕਾ ਦੇਣਾ ਛੋਟੀ ਬਾਹ ਜਾਊਗੀ ਨਾਲ ਅਖੇ ਨਹੀਂ ਤੁਸੀਂ ਇਹ ਤੋਂ ਦੇਖ ਲਓ ਵੀ ਨਾ ਥੋੜੀ ਬਾਹ ਜਾਣੀ ਹੈ ਨਾ ਉਹ ਆਪਣੀ ਬਾਹ ਲੈ ਕੇ ਗਿਆ ਉਹ ਗੁੜਾ ਪੰਜਾ ਲੈ ਕੇ ਗਿਆ ਕਹਿੰਦੇ ਫਰਾਡ ਤਾਂ ਨਹੀਂ ਲੱਗਦਾ ਤੁਹਾਨੂੰ ਨਹੀਂ ਜਿਨਾਈ ਉਹ ਬਾਹ ਹੋ ਰਹੀ ਹੈ ਚਲੋ ਠੀਕ ਹੈ ਹੋ ਬੈਠੇ ਰਹੋ ਪਲੇਟਫਾਰਮ ਤੇ ਗੱਡੀ ਆਊਗੀ ਚੱਲਾਂਗੇ ਹਾਂਜੀ ਅੰਤਰ ਹਰ ਨਾਮ ਬਾਸਨਾ ਸਮਾਣੀ ਹਰ ਦਰ ਸ਼ੁਭਾ ਉੱਤਮ ਬਾਣੀ ਸ਼ੋਭਾ ਦੀ ਐ ਬਪਰਨਾ ਸੋਭਾ ਬਾਲਦੇ ਅੱਛਾ ਜੀ ਸ਼ੋਭਾ ਸ਼ੋਭਾ ਇੰਦੀ ਵਾਲੇ ਕਹਿੰਦੇ ਸੋਭਾ ਹੈ ਸਾਡੇ ਅੱਛਾ ਜੀ ਪੰਜਾਬੀ ਚ ਜੀ ਹਾਂ ਦੀ ਬਾਸਨਾ ਉਹ ਸਵਾਂਝਾ ਹੈ ਵਿੱਚ ਜਿਵੇਂ ਅਸੀਂ ਆ ਸਮੈਲ ਹੁੰਦੀ ਹੈ ਨਾ ਬੈਡ ਸਮੰਦ ਕਰਾਉਣ ਦੇ ਵਿੱਚ ਹਸਪਤਾਲਾਂ ਦੇ ਵਿੱਚ ਉਹਦੇ ਕਹਿੰਦੀ ਆਪਣਾ ਪੋਚਾ ਮਾਰ ਦਿੰਦੇ ਨੇ ਉਹਦੀ 스멜 ਦਬ ਜਾਂਦੀ ਜਿਵੇਂ ਕਸਤੂਰੀ ਹੁੰਦਾ ਜੇ ਇਤਿਚਾਰ ਨਹੀਂ ਅਸੀ 스멜 ਦਬ ਜਾਂਦੀ ਹੈ ਵਿੱਚ ਚਲੋ ਇਹ ਗੁਲਬਾਨੀ ਦਾ ਪਰਮੋਰ ਪਰ ਇਹ ਤਾਂ ਉਲਟੇ ਪਾਸੇ ਨੂੰ ਕਸਤੂਰੀ ਦੀ ਚੰਗੀ 스멜 ਹਿੰਗ ਮਾੜੀ 스멜 ਨਾਲ ਮਾਰ ਦਿੰਦੀ ਸਵਾਲ ਇਹ ਨਹੀਂ ਹੈਗਾ ਸਵਾਲ ਇਹ ਹੈ ਕਿ ਇੱਕ 스멜 ਦੂਈ ਦਬ ਲੈਂਦੀ ਆ ਆਪਾਂ ਇੰਨਾ ਹੀ ਪਰਮਾਨ ਨੇ ਭੈੜੀ 스멜 ਚੰਗੇ ਨੂੰ ਵੀ ਦਬ ਲੈਂਦੀ ਆ ਚੰਗੀ ਭੈੜੀ ਨੂੰ ਵੀ ਦਬ ਲੈਂਦੀ ਆ ਜਿੱਤੇ ਜੀ ਛਿੜਕਦੇ ਆ ਛਿੜਕਦੇ ਆ ਪੈਰਸ ਮੈਲ ਹੁੰਦੀ ਆ ਉੱਤੇ ਬੈਲ ਨੂੰ ਛੰਡ ਦਬਲ ਹੈ ਠੀਕ ਹੈ ਚਾਹੇ ਆਪਾਂ ਆ ਧੂਪ ਬਤੀ ਲਾਉਨੇ ਅਰਗਬਤੀ ਲਾਉਨੇ ਆ ਧੂਪ ਲਾਉਂਦੇ ਆ ਕਿਉਂਦੇ ਉਹ ਜਾਣਦੇ ਆ ਸਮਾਜ ਆ ਬਾਸ਼ਨਾ ਉਹਦੇ ਵਿੱਚ ਹਾਂਜੀ ਹਰ ਦਰਸ਼ ਸੋਭਾ ਮਹਾ ਉੱਤਮ ਬਾਣੀ ਹਰ ਦੀ ਜਿਹੜੀ ਸੋਭਾ ਫਰਦਰ ਸੋਭਾ ਬੋ ਉਤਮ ਬਣੀ ਫਰਦਰ ਜਿਹੜੀ ਦਰਬਾਰ ਦੀ ਸੋਭਾ ਹੈ ਫਰਦਰ ਦਾ ਗਿਆ ਗੱਲਾਂ ਨਾਨਕ ਆਖਣਾ ਉਹ ਤੇ ਜਿਹੜੀ ਦਰਬਾਰ ਦੀ ਸੋਭਾ ਹੈ ਮਾ ਉਤਮ ਬਣੀ ਉਦੋਂ ਉਤਮ ਬਣੀ ਨਹੀਂ ਕੋਈ ਜੇ ਪੁਰਖ ਸੁਣਾ ਤੋ ਹੋਏ ਨਿਹਾਲ ਨਾਨਕ ਸਤਗੁਰ ਮਿਲਿਆ ਪਾਇਆ ਨਾਮ ਧਨਮਾਲ ਜੇ ਪੁਰਖ ਸੁਣੇ ਹੋਏ ਨਿਹਾਲ ਜਿਹੜਾ ਪੁਰਖ ਅਸ ਸ਼ੋਭਾ ਸੁਣ ਲੈਂਦਾ ਉਹਨੇ ਹਾਲ ਹੋ ਜਾਂਦਾ ਉਹ ਹੁਣ ਕੀ ਗੱਲ ਹੋਈ ਇਹ ਨਹੀਂ ਹੋਈ ਕਿ ਸੁਣੇ ਹੋਏ ਤੋਂ ਸੁਣ ਲੈਂਦਾ ਹਾਂ ਹਾਂ ਜਿਹੜਾ ਡਾਇਰੈਕਟ ਸੁਣਦਾ ਜਿਹੜਾ ਡਾਇਰੈਕਟ ਸੁਣ ਲੈਂਦਾ ਹਰਦਾਰ ਕੀ ਸ਼ੋਭਾ ਜਿਹੜਾ ਡਾਇਰੈਕਟ ਸੁਣ ਲੈਂਦਾ ਉਹਨੇ ਸੁਣੀ ਦੋ ਨਿਹਾਲ ਨਿਹਾਲ ਵੀ ਹੋ ਜਾਂਦਾ ਜਿਹੜਾ ਡਾਇਰੈਕਟ ਸੁਣ ਲੈਂਦਾ ਉਹਦਾ ਨਿਹਾਲ ਹੋ ਜਾਂਦਾ ਈਲਾ ਹੁੜੂ ਹੁੜਸੁੰਦਾ ਉਹਦੇ ਹਾਲ ਤਾਂ ਨਹੀਂ ਹੁਕਦਾ ਅੱਛਾ ਜੀ ਖੇੜ ਜਰੂਰ ਜਾਂਦੇ ਅਰਾਧ ਜਰੂਰ ਰੋਬ ਉਹ ਵੀ ਨਿਹਾਲ ਹੈ ਪੁਰਖ ਅਖਰ ਆਇਆ ਨਾ ਜੀ ਪੁਰਖ ਨੂੰ ਸੁਣ ਰਹੀਆਂ ਨੇ ਜੇ ਪੁਰਖ ਸੁਣੈ ਸੋ ਹੋਏ ਨਿਹਾਲ ਨਾਨਕ ਗੁਰ ਸਤਗੁਰ ਪਾਇਆ ਨਾਮ ਧਨਮਾਲ ਪੁਰਖੇ ਸੁਣਵਾ ਮਤਲਬ ਇਸ ਤਰ੍ਹਾਂ ਛੋਣ ਨਹੀਂ ਸਕਦੀ ਇਸ ਤਰੀ ਨਹੀਂ ਸੁਣ ਸਕਦੀ ਤੇ ਸੱਚ ਹੈ ਇਹ ਦਰਗਾਹ ਦੀ ਡਾਇਰੈਕਟ ਬਾਣੀ ਪੁਰਖ ਦੂਏ ਸੁਣਦੀ ਹੈ ਕੋਈ ਸ਼ੰਕਾ ਵਾਲੀ ਗੱਲ ਨਹੀਂ ਹੈ ਕਿਸੇ ਵੀ ਜੇ ਸੁਣਨੀ ਹੈ ਇੱਕ ਲੈਣਾ ਪਊਗਾ ਦਈ ਪਰੋ ਵਿਸ਼ਵਾਸ ਕਰੇ ਪੁਰਖ ਦੀ ਗੱਲ ਤੇ ਸੁਣੀ ਤੇ ਪੁਰਖ ਦੀ ਗੱਲ ਤੇ ਸੁਣੀ ਤੇ ਉਹ ਵਿਸ਼ਵਾਸ ਕਰ ਲਵੇ ਫਿਰ ਪੁਰਖ ਦੇ ਨਾਲੇ ਨੰਬੀ ਜਾਂਦੀ ਹੈ ਜਿਵੇਂ ਵਜੀਰ ਰਾਜੇ ਦੇ ਨਾਲੇ ਲੁੱਤੀ ਜਾਂਦੇ ਫਿਰ ਲੁੱਗੇ ਜਾਂਦੀਆਂ ਨਾਲੇ ਨਾਨਕ ਸਤਗੁਰ ਮਿਲੀਐ ਪਾਇਆ ਨਾਮ ਧਨਮਾਲ ਨਾਨਕ ਨੇ ਸਤਗੁਰ ਮਿਲੇ ਤੋਂ ਹੀ ਨਾਮ ਧਨਮਾਲ ਬੰਦ ਸਤਗੁਰ ਨੇ ਤਾਂ ਬਾਣੀ ਸੁਣੀ ਮਿਲਿਆ ਕੀ ਨਾਮ ਧਨਮਾਲ ਮਿਲਿਆ ਗਿਆਨ ਮਿਲਿਆ ਜਿਹਦਾ ਨਾਮ ਧਨਮਾਲ ਹੈ ਗਿਆਨ ਹੈ ਸਤਗੁਰ ਤੋਂ ਨਾਮ ਧਨਮਾਲ ਮਿਲਿਆ ਗਿਆਨ ਮਿਲਿਆ ਗਿਆਨ ਹੀ ਆਗਾ ਤਾਂ ਹੈ ਸੋਝੀ ਮਿਲ ਗਈ ਹਾਂਜੀ ਮਹੱਲਾ ਚੌਥਾ ਸਤਿਗੁਰ ਕੇ ਜੀ ਕੀ ਸਾਰ ਨਾ ਜਾਪੈ ਕੇ ਪੂਰੇ ਸਤਿਗੁਰ ਭਾਵੈ ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ ਜੋ ਸਿੱਖਾਂ ਨੂੰ ਲੋਚੈ ਤੋ ਗੁਰ ਖੁਸ਼ੀ ਆਵੇ ਸਤਗੁਰ ਦਾ ਜਿਹੜਾ ਮਾਨ ਹੈ ਤੋ ਉਹ ਨਹੀਂ ਪਤਾ ਲੱਗਦਾ ਕਿੱਥੇ ਆਇਆ ਹੈ ਲੱਭਦਾ ਹੀ ਨਹੀਂ ਜਿੱਦੇ ਵਾਂਗ ਜਿੰਨਾ ਮਰਜੀ ਕੋਤੇ ਮਾਲ ਲਓ ਸਤਗੁਰ ਦਾ ਮਾਨ ਹੀ ਲੱਭਦਾ ਐਸਾ ਲੀਨ ਹੋ ਗਿਆ ਸਤਿਗੁਰਤਾ ਬੋਲੂ ਆਪਣੇ ਗੋੜ ਚ ਜਿਆਪਦਾ ਹੀ ਨਹੀਂ ਹੈ ਕਦੇ ਵਖਰਾ ਹੋ ਕੇ ਆਪਣਾ ਦਰਸ਼ਨ ਦਿੰਦਾ ਹੀ ਦੀ ਚਰ ਕੇ ਤਾਂ ਦਾ ਜਬੇ ਆਪਣੀ ਗਾਇ ਘਰ ਕਰੇ ਉਹਦੀ ਕੋਈ ਮਰਜ਼ੀ ਉਹ ਨਹੀਂ ਹੈ ਕਿੰਨੀ ਵੀ ਗੋਲ ਮੋਲ ਗੱਲ ਕਰਕੇ ਕਿੰਨੀ ਵੀ ਬੁਝਾਰਤ ਪਾ ਕੇ ਉਹਨੂੰ ਕੋਸ਼ਿਸ਼ ਕਰੀਏ ਵੀ ਆਪਣੇ ਬੰਦ ਦੀ ਕੋਈ ਗੱਲ ਕਹੇ ਪਰ ਵਖਰਾ ਹੋ ਕੇ ਕੁਝ ਕਹੇ ਕਈ ਨਹੀਂ ਉਹ ਆਲੀਨ ਹੋ ਗਿਆ ਜੋ ਪਾਣੀ ਸੰਗ ਪਾਣੀ ਪਾਣੀ ਰਹਿ ਗਿਆ ਪਾਣੀ ਦਾ ਨਾਮ ਸਤਗੁਰ ਆਪਾਂ ਜੁਮਾਈ ਲੈੰਦਾ ਇਹਦੀ ਕੋਈ ਗੱਲ ਉਹ ਅਸਲ ਤੇ ਦੇਖਦਾ ਸਭ ਕੁਝ ਪਹਿਲਾਂ ਤਾਂ ਦੀਦਾ ਸੀ ਸਤਗੁਰ ਨੂੰ ਵੀ ਉਹਨਾਂ ਹੀ ਦੀਦਾ ਜਿਨਾ ਸਤਗੁਰ ਨੂੰ ਉਹ ਵੇਖੇ ਉਹਨਾਂ ਨਜ਼ਰ ਨਾਲ ਉਹ ਉੱਚੀ ਗੱਲ ਨਹੀਂ ਕਰਦਾ ਚਾਹ ਬੋਲ ਨਹੀਂ ਬੋਲਦਾ ਪਰ ਕਾਰਨ ਦਦਾ ਹੋ ਸਤਗੁਰ ਜੀ ਇਸਾਲ ਨਾ ਜਾਣਾ ਸਤਗੁਰ ਦਾ ਜੀ ਕਿੱਥੇ ਖੋ ਗਿਆ ਕਿੱਥੇ ਗੁੰਮ ਗਿਆ ਇਹਦਾ ਵੀ ਹੁਣ ਪਤਾ ਲੱਗਦਾ ਗਹਿਰਾਈ 'ਚ ਮਨ ਹੈ ਹੋਰੀ ਜੋਤੀ ਜੀ ਮਰ ਗਈ ਉਹ ਚੀਜ਼ ਹੈ ਹੋਰੀ ਉਹ ਮਾਰੇ ਕਹਾਂ ਸੂਡੂ ਬਰੇ ਨਾ ਨਾ ਨਾ ਉਹ ਕਾਂ ਸੂਡੂ ਉਹ ਤਾਂ ਆਮ ਗਿਆ ਜੇ ਮਨ ਕੋਈ ਮਰ ਕੇ ਆਦਮੀ ਸਰੀਰ ਛੱਡ ਕੇ ਚਲਾ ਜਾਂਦਾ ਨਾ ਦੁਨੀਆ ਚੋਂ ਉਹਦੀ ਗੱਲ ਗੱਲ ਰਹਿ ਜਾਂਦੀ ਆਦਮੀ ਹੋਇਆ ਵੀ ਮਨ ਹੈ ਦੀ ਹਾਂ ਕਿបាន ਹੈਗਾ ਵਿੱਚੇ ਸਮਾਇਆ ਹੋਇਆ ਪਰ ਰੜਕਦਾ ਕਿਤੇ ਨਹੀਂ ਕਿ ਪੂਰੇ ਸਤਗੁਰ ਭਾਵ ਤਾਂ ਪੂਰੇ ਸਤਗੁਰ ਨੂੰ ਚੰਗਾ ਲੱਗਦਾ ਬਾਣ ਜੇ ਰੜਕੇ ਫਿਰ ਜੰਦਾ ਨਹੀਂ ਲੱਗਦਾ ਕਿ ਆਪਣੀ رائے ਦਵੇ ਕਿਤੇ ਨਾ ਕਿਤੇ ਰੜਕੇ ਫਿਰ ਜੰਦਾ ਲੱਗਦਾ ਦੇ ਤਾਂ ਆਪਣੀ ਰਾਏ ਦੇ ਦਿਲ ਕੀ ਖੜੀ ਕਰ ਦਵੇ ਸਤਬਰ ਨੂੰ ਮਾਨ ਕੇ ਉਹ ਪਉਂਦਾ ਉਹਨੇ ਆਪਣੀ ਹੋਂਦ ਬਿਲਕੁਲ ਹੀ ਗੁਰ ਸਿੱਖਾਂ ਅੰਦਰ ਸਤ ਗੁਰੂ ਵਰਤੈ ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ ਕਿਉਂਕਿ ਪਹਿਲਾਂ ਤਾਂ ਉਹ ਕਹਿੰਦਾ ਮਨ ਸੀਗਾ ਰੋੜਾ ਹੋਇਆ ਹੋਇਆ ਰੋੜਾ ਹੋਇਰੋ ਬਾਟਕਾ ਫਿਰ ਕਹਿੰਦਾ ਵੀ ਰੋੜਾ ਤਾਂ ਪੰਥੀ ਨੂੰ ਦੁੱਖ ਦਿੰਦਾ ਭਾਈ ਅਣਕਦਾ ਫਿਰ ਕਹਿੰਦਾ ਭਈ ਆਪਾਂ ਖੇ ਬਣ ਜਾਂਦੇ ਆ ਧਰਤੀ ਦੀ ਬਰੀਕ ਮਿੱਟੀ ਬਣ ਜਾਂਦੇ ਆ ਉਹ ਕਹਿੰਦਾ ਉਹ ਕਹੇ ਉਹ ਵੀ ਤਾਂ ਹੈਗੀ ਆ ਉਹ ਅੱਖ ਰੋਚ ਪੈ ਜਾਂਦੀ ਹੈ ਭਾਈ ਅੱਖਾਂ ਜੀ ਵੀ ਪਾਉ ਕੱਪੜਿਆਂ ਤੇ ਪੈ ਉਹ ਵੀ ਨੁਕਸਾਨ ਹੈ ਕਰੂ ਉਹਦਾ ਫਾਇਦਾ ਦੀ ਕੋਈ ਹੋਣਾ ਫਿਰ ਕਹਿੰਦੇ ਪਾਣੀ ਬਣ ਜਾਂਦੇ ਆ ਪਾਣੀ ਅੱਖਾਂ ਚੋਂ ਮਿੱਟੀ ਕੱਢ ਦੂਗਾ ਕੱਪੜੇ ਵੀ ਧੋ ਦੂਗਾ ਉਹ ਕਹਿੰਦਾ ਠੀਕ ਹੈ ਕੱਪੜੇ ਧੋ ਦੂ ਅੱਖਾਂ 'ਚ ਪੱਟੀ ਵੀ ਕੱਢ ਦੂ ਪਰ ਜਦ ਘਰ ਕੋ ਹੋ ਜਾਂਦਾ ਜੰਮ ਵੀ ਜਾਂਦਾ ਇਹ ਵੀ ਨਹੀਂ ਠੀਕ ਦੋ ਗੋਣੇ ਸਿਰਾਂ ਸੱਤਾ ਹੋ ਜਾਂਦਾ ਪਾੜੀ ਇਹਦੀ ਵੀ ਕਹਿੰਦਾ ਹੁਣ ਕੀ ਕਰੀਏ ਕਹੇ ਹਰ ਜਾਣਾ ਐਸਾ ਚਾਹੀਏ ਜੈਸਾ ਹਰ ਹੀ ਹੋਏ। ਉਹ ਜਾਦ ਮਨ ਹਾਰ ਹਰ ਹੀ ਹੋ ਗਿਆ ਹੁਣ ਲੜਕਣਾ ਕਿੱਥੋਂ ਆ। ਹੁਣ ਤਾਂ ਹਾਰ ਹੋ ਗਿਆ। ਪੇੜ ਘਟਿਆ ਪੇੜ ਬਣ ਗਿਆ ਪੇੜ ਤੇ ਨਾ ਉੱਤਰਾ ਰਿਹਾ ਨਾ ਚੇਤਰ ਰਿਹਾ ਨਾ ਮੰਨ ਰਿਹਾ ਤੋਂ ਇਹ ਦੀਦਾ ਪੂਰਾ ਸਤ ਗੁਰੂ ਵਰਤੈ ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ ਗੁਰ ਦੇ ਅੰਦਰ ਸੱਚ ਦਾ ਗਿਆਨ ਵਰਤਦਾ ਜਿਹੜੇ ਸਿੱਖ ਨੇ ਜਿਹੜਾ ਸੱਚ ਦਾ ਗਿਆਨ ਹੈ ਉਹਦੇ ਭੌਰੇ ਨੇ ਉਹ ਤਲਾਸ਼ੀ ਨੇ ਉਹਦੇ ਉਹਦੇ ਸ਼ਦਾਈ ਨੇ ਸਤਿਗੁਰੂ ਵਰਤਦਾ ਉਹਨਾਂ ਦੇ ਅੰਦਰ ਉਹਦਾ ਸਤਿਗੁਰੂ ਚਾਹੁੰਦੇ ਨੇ ਦਾ ਗਿਆਨ ਉਹ ਹੋਰ ਗਿਆਨ ਨਹੀਂ ਚਾਹੁੰਦੇ ਉਹਨਾਂ ਨੂੰ ਨਹੀਂ ਚੰਗਾ ਲੱਗਦਾ ਹੋਰ ਗਿਆਨ ਹੋ ਗੱਲੇ ਚੰਗੀ ਲੱਗਦੀ ਉਹਨਾਂ ਨੂੰ ਗੁਰਬਾਣੀ ਦੇ ਸੁਭਾਅ ਸਤਿਗੁਰੂ ਠੀਕ ਹੈ ਸਤਿਗੁਰੂ ਪਰਮੇਸ਼ਰ ਨੂੰ ਨਹੀਂ ਕਹਾਂਗੇ ਇਹ ਸੱਚ ਦਾ ਗਿਆਨ ਵਰਤਦਾ ਉਹਨਾਂ ਦੇ ਅੰਦਰ ਜੋੜ ਨਹੀਂ ਨਾ ਲੱਗ ਸਕਦਾ ਦੋ ਆਤਮਾ ਨੂੰ ਦੋ ਆਤਮਾ ਨੂੰ ਜੋੜ ਕੇ ਮੈਂ ਲੱਗਦੀ ਉਹਦਾ ਅਸਰ ਆਉਣਾ ਦੇ ਉੱਤੇ ਉਹਦੀ ਲਾਈਟ ਪੈ ਰਹੀ ਹੈ ਉਹਦੀ ਜੋਤ ਪੈ ਰਹੀ ਹੈ ਅਨਵਰਤ ਰਿਆ ਚੱਲ ਰਹੇ ਉਹਨਾਂ ਦੇ ਅੰਦਰ ਕਿੰਨਾ ਗਿਆਨ ਦਾ ਪੂਰਾ ਹੈ ਪੂਰਾ ਗਿਆਨ ਹੈ ਉਹਨਾਂ ਦੇ ਅੰਦਰ ਜੋ ਸਿੱਖਾਂ ਨੂੰ ਲੋਚੈ ਸੋ ਗੁਰਖੁਸ਼ੀ ਆਵੇ ਜਿਹੜਾ ਸਿੱਖਾਂ ਨੂੰ ਦੇਖੋ ਜਿਹੜਾ ਸਿੱਖਾਂ ਨੂੰ ਲੋਚਦਾ ਹੈ ਉਹਦੇ ਤੇ ਗੁਰੂ ਦੀ ਖੁਸ਼ੀ ਆਉਂਦੀ ਹੈ ਗੁਰਖੁਸ਼ੀ ਆਵੇ ਸਤਬੁਰ ਦੀ ਖੁਸ਼ੀ ਉਹਦੇ ਤੇ ਆ ਜਿਹੜਾ ਸਿੱਖਾਂ ਨੂੰ ਲੋਚਦਾ ਉਹ ਜਿਹੜਾ ਸਿੱਖਾ ਨੂੰ ਨਹੀਂ ਚਾਹੁੰਦਾ ਪਿਓ ਨੂੰ ਜਾਏ ਨਾ ਜਾਏ ਜਿਹੜਾ ਉਹਦੇ ਰਾਜ਼ ਨੂੰ ਚਾਹੁੰਦਾ ਦਾ ਉਹਦੇ ਨੇ ਪਿਓ ਦੀ ਖੁਸ਼ੀ ਹੁੰਦੀ ਹੈ ਉਹ ਪਿਓ چاہے ਪਿਓ ਨੂੰ ਜਾਣਦਾ ਵੀ ਹੋਵੇ ਪੂਰੇ ਤੋਂ ਗੁਰੂ ਸੇਖ ਨੇ ਇੰਨੇ ਤਾਂ ਗੁਰੂ ਨੇ ਗੁਰ ਸਿੱਖਾ ਮਿਲਣਾ ਇਹ ਮਿਲਣਾ ਜਿਹੜਾ ਗੁਰ ਨੂੰ ਲੋਚਿਆ ਗੁਰ ਨੂੰ ਪ੍ਰੇਮ ਕਰੇ ਗੁਰੂ ਸੇਖਾਂ ਨੂੰ ਹਰ ਵਾਂ ਚਾਹੇ ਵੀ ਇਹਨਾਂ ਨਾਲੇ ਮੈਂ ਬੈਠਾ ਰਹਾ ਇਹਨਾਂ ਨਾਲੇ ਗੱਲ ਕਰਾਂ ਇਹਨਾਂ ਦੀ ਉਹ ਸੇਵਾ ਕਰਾਂ ਇਹਾਂ ਦੀ ਉਹ ਗੱਲ ਬੰਦਾ ਸੁਣਾ ਵੱਧ ਤੋਂ ਵੱਧ ਕਿ ਲੋਚਾ ਹੁੰਦਾ ਗੁਰੂ ਵੀ ਖੁਸ਼ੀ ਹੁੰਦੀ ਸਾਨੂੰ ਲੋਚੇ ਸੋ ਗੁਰੂ ਖੁਸ਼ੀ ਆਵੇ ਹੁਣ ਇੱਥੇ ਗੁਰੂ ਨਹੀਂ ਲਿਖਿਆ ਸਤਗੁਰੂ ਵੀ ਤਾਂ ਗੁਰੂ ਹੈ ਹਾਂਜੀ ਸਤਗੁਰ ਮਨਭਾਵ ਹੈ ਠੀਕ ਹੈ ਜੀ ਗੁਰੂ ਦਾ ਉਹ ਵੀ ਨਹੀਂ ਲਿਖਿਆ गुरु दी दा सारेया दे उते ही है गुरु दा का काम बहुत बड़ा गुरु दा सारी सृष्टि दा सृष्टि दी जिम्मेदारी ओदी ता ठीक है जी सतगुरु आखे सो कार कमावन सो जप कमावे गुरु सिक्खा की काल सच्चा ठाए पावे बोले ते जप लफदे भी अफसाग खेल के जप लफदे स्पेशल अर्थ देते बिल्कुल ਗੁਰੂ ਦੇ ਸਾਰੇ ਕਾਰਕਮਾਉਂਦੇ ਨੇ ਉਹ ਜਿਹੜੇ ਸਤਗੁਰ ਆਖਦਾ ਨੇ ਸਤਗੁਰ ਦਾ ਇਹੀ ਆਖਿਆ ਹੋਇਆ ਸੋ ਜਪ ਕਮਾਪੇ ਉਹਨੂੰ ਸਮਝ ਕੇ ਕਮਾਉਂਦੇ ਨੇ ਉਹਨੂੰ ਸਮਝ ਕੇ ਕਮਾਉਂਦੇ ਨੇ ਸਮਝ ਕੇ ਸਤਗੁਰ ਦੇ ਆਖੇ ਨੂੰ ਸਮਝ ਕੇ ਕਮਾਉਂਦੇ ਨੇ ਜਪ ਦਾ ਅਰਥ ਸਮਝਣਾ ਹੈ ਜਪਦੇ ਦੀ ਲਿਖਿਆ ਜਪ ਕੀ ਕਮਾਉਂਦੇ ਨੇ ਸਭ ਜਣਾ ਔਰ ਕਬੂੜ ਜੱਪ ਦੇ ਸਪਸ਼ਟ ਅਰਥ ਕਰਤੇ ਸਭ ਜਣਾ ਇਹ ਸਮਝੀ ਨਾਲ ਨਹੀਂ ਕਮਾਉਣਾ ਵੀ ਕਿਹਾ ਕੁਝ ਸੁਣਨਾ ਕੁਝ ਭਜਲੇ ਡਾਉਣਾ ਕਰਕੇ ਉਧਰ ਨੂੰ ਜੇ ਸਭ ਜਿੱਕੇ ਕਮਾਉਂਦੇ ਗੁਰਬਾਣੀ ਨੂੰ ਬਈ ਸਾਫ ਕਰਨ ਦਾ ਖਿਆਲ ਇਹਦੀ ਸੀ ਪੈਦਾ ਹੁਣ ਇਹ ਗੁਰਬਾਣੀ ਨੂੰ ਸਮਝ ਕੇ ਕਮਾਉਂਦੇ ਸਮਝ ਕੇ ਬਈ ਸਾਫ ਕਰਨ ਦਾ ਸਵਾਲ ਇਹਦੀ ਪੈਦਾ ਹੁਣ ਕੇਲਾ ਦਾ ਹੈਗਾ ਸੱਸਦਾਨਾ ਦਾ ਉਹ ਦੁਨੀਆ ਦੀ ਵਡਿਆਈ ਲੈਣੀ ਸੀ ਜਿਹਨੂੰ ਕਿਹਾ ਦੁਨੀਆ ਗਿਆ ਵਡਿਆਈਆਂ ਅੱਗੇ ਤੇ ਜਲ ਜਲ ਗਿਆ ਨਾ ਵਿੱਚੇ ਵਡਿਆਈਆਂ ਜਲਦੇ ਵਡਿਆਈਆਂ ਦੇ ਵਿੱਚੇ ਹੀ ਜਲ ਮਾਰੀ ਗਈ ਕਹਤੋ ਕਿ ਪਾਣੀ ਦੇਣ ਲੱਗਿਆ ਗੁਰਸਿੱਖਾਂ ਕੀ ਕਾਲ ਸੱਚਾ ਥਾਂ ਪਾਵੇ ਗੁਰਸਿੱਖਾਂ ਦੀ ਜਿਹੜੀ ਕਾਲ ਹੁੰਦੀ ਹੈ ਇੱਥੇ ਨਹੀਂ ਪਾਉਂਦਾ ਕੋਈ ਇੱਥੇ ਨਹੀਂ ਉਹਨੂੰ ਮਿਲਦੇ ਸਰੋਪੇ ਬੜਿਆਈਆਂ ਉਹ ਤਾਂ ਦਰਗਾਹ ਜੋ ਨਾਲੀ ਕਾਲ ਤਾਂ ਹੈ ਸੰਸਾਰੀ ਲੋਕ ਜੋ ਬੰਦਣ ਪਰ ਸੰਸਾਰੀ ਲੋਕਾਂ ਨੂੰ ਕੀ ਸਮਝਦਾ ਸੰਸਾਰੀ ਲੋਕ ਜੇ ਉਹ ਸੰਸਾਰੀ ਲੋਕ ਉਹਨੂੰ ਕੁਝ ਨਾ ਸਮਝਣ ਉਹ ਲੈਣਾ ਕੀ ਹੈ ਨਾ ਤੇ ਉਹ ਸੰਸਾਰੀ ਲੋਕਾਂ ਨੂੰ ਕੁਝ ਨਾ ਉਹਦਾ ਸੰਸਾਰੀ ਲੋਕਾਂ ਨੂੰ ਮਤਲਬ ਭਗਤਾ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਕਿੰਦਾ ਜੋੜ ਆਉਣਾ ਸੰਸਾਰੀ ਲੋਕਾਂ ਨਾਲ ਉਹ ਭਗਤ ਹੈ ਇਹੀ ਗੱਲ ਹੈ ਹਾਂਜੀ ਵਿਣ ਸਤਗੁਰ ਕੇ ਨਾਲ ਜੋੜ ਵੀ ਪੁਆਇੰਟ ਹੈ ਭਗਤੀ ਉਹ ਤੋਂ ਕੱਚਾ ਹੋ ਗਿਆ ਹਾਂਜੀ ਵਿਣ ਸਤਗੁਰ ਕੇ ਹੁਕਮੇ ਜੇ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜੇ ਤਿਸ ਗੁਰਸਿੱਖ ਫਿਰ ਨੇੜ ਨਾ ਆਵੇ ਆਇਦੋਂ ਵੀ ਬੜਾ ਅਪਰਾਧ ਕਰਤਾ ਉਹ ਲੋਕ ਕੀ ਕਰਦੇ ਨੇ ਬਿਨ ਸਤ ਗੁਰ ਦੇ ਹੁਕਮ ਤੇ ਲੋਕਾਂ ਕੋਲੋਂ ਕੰਮ ਕਰਾਉਂਦੇ ਨੇ ਬਿਨ ਸਤ ਗੁਰ ਦੀ ਇੱਛਾ ਤੋਂ ਲੋਕਾਂ ਤੋਂ ਕੱਬ ਨਹੀਂ ਕਰਾਇਆ ਜਾ ਸਕਦਾ ਅਪਰਾਧ ਹੈ ਇਹ ਵੀ ਅਪਰਾਧ ਕਰਾਇਆ ਜੋ ਗੁਰਬਾਣੀ ਵਿੱਚ ਲਿਖਿਆ ਹੋਇਆ ਨਹੀਂ ਜੇ ਹਾਂ ਗੁਰਸਿੱਖ ਨੂੰ ਕੰਮ ਕਰਾਉਣਾ ਉਹ ਕੰਮ ਕਰਾਉਣਾ ਗੁਰਸਿੱਖਾਂ ਤੋਂ ਅਪਰਾਧ ਹੈ ਗੁਰੂ ਨੂੰ ਲਵੇ ਨਹੀਂ ਲਾਉਂਦਾ ਅਪਰਾਧ ਲੇਲੇ ਨੇ ਉਹਨਾਂ ਦਾ ਦੂਰ ਹਟ ਦੂਰ ਰਹਿੰਦੇ ਇਹ ਉਹਨੂੰ ਇਨਾਮ ਮਿਲਦਾ ਦਰਗਾਹ ਜਾ ਕੇ ਇਹ ਬਈ ਸਾਫ ਕਰਾਉਣ ਵਾਲੇ ਨੂੰ ਇਹ ਇਨਾਮ ਹੈ ਦਾ ਅੰਦਰ ਜਾ ਕੇ ਦੇਖ ਲੈਣ ਗੁਰਬਾਣੀ ਪੜ੍ਹ ਕੇ ਦੇਖ ਲੈਣ ਹੁਣ ਗੁਰਬਾਣੀ ਪੜ੍ਹ ਲੈਣ ਜਿਹੜਾ ਉਹ ਕੱਲ ਸੀ ਕਰ ਲਿਆ ਕੀ ਅਸੀਂ ਕੀਤਾ ਕੀ ਕਰਨਾ ਚਾਹੀਦਾ ਸੀ ਹੁਣ ਇਹਦੀ ਕੋ ਕਰ ਲੈਣ ਦੁਆਰਾ ਕਦੀ ਗੱਲ ਹੈ ਜੋ ਵੀ ਟਾਈਮ ਹੈਗਾ ਤੇ ਇਹ ਜ਼ਿੰਦਗੀ ਅਜਾਈ ਚਲੀ ਜਾਊਗੀ ਚਲੀ ਤਾਂ ਗਈ ਹੁਣ ਤਾਂ ਕਦੀ ਲਾਏ ਕੱਲ ਅੱਗੇ ਗੁਰਸਿੱਖ ਕਾਰ ਕਮਾਵੇ ਜੇ ਗੁਰ ਸਿੱਖਦੇ ਗੁਰਸਿੱਖ ਸਤਿਗੁਰੂ ਦੇ ਅੱਗੇ ਜੀਆ ਆਪਣਾ ਅਰਪਣ ਕਰਦੇ ਵੇ ਇਹ ਕਹੇ ਜਿਉ ਤੂੰ ਚਲਾਇਂ ਤੇ ਮੈਂ ਹੋਰ ਕਾ ਜਾਣੂ ਤੁਂ ਤੇਰੇ ਓਦੇ ਹੋਕਮ ਅੰਚਲੇ ਉਦੇ ਭਾੜੇ ਚੱਲੇ ਇਹ ਤਾਂ ਲੋਕ ਆਪਣੇ ਭਾੜੇ ਚਲਾਉਂਦੇ ਨੇ ਚਾਹੇ ਕਾਲ ਸੇਵਾ ਵਾਲੇ ਨੇ ਚਾਹੇ ਇਹ ਇਹ ਤਾਂ ਆਪਣੇ ਭਾੜੇ ਚਲਾਉਂਦੇ ਨੇ ਇਹ ਅਪਰਾਧ ਹੈ ਆਪਣੀ ਇਹਨਾਂ ਦੀ ਇੱਛਾ ਹੋਊਗੀ ਸੌ ਸਰਾਂ ਵੜਾਉਣੀ ਹੈ ਪਰਮੇਸ਼ਰ ਦੀ ਇੱਛਾ ਦੀ ਹੈ ਠੀਕ ਦੀ ਇੱਛਾ ਦੀ ਹੈ ਕੀ ਕਰ ਲੈ ਇੱਛਾ ਕਿਸ ਨੂੰ ਦਾ ਉਹਦੀ ਇੱਛਾ ਤੁਹਾਡੇ ਕੋਲ ਗੁਰਸਤਗੁਰ ਅਗੈ ਕੋ ਜੀਉ ਲਾਇਕ ਘੱਲੈ ਤਿਸ ਅੱਗੇ ਗੁਰਸਿੱਖ ਕਾਰ ਕਮਾਵੇ ਜੇ ਠੱਗੀ ਆਵੇ ਠੱਗੀ ਉੱਠ ਜਾਏ ਤਿਸ ਨੇੜੇ ਗੁਰਸਿੱਖ ਮੂਲ ਨਾ ਗੁਰੂ ਕੋਲ ਜਾ ਕੇ ਆ ਜਾਂਦਾ ਤਾਂ ਨੇੜੇ ਐ ਔਰ ਗੁਰਮਤਨ ਸਾਹਿਬ ਕੋਈ ਕਾਬੂ ਦੀ ਕਰਦਾ ਉਹ ਥਗੀ ਹੈ ਅਸਲੀ ਗੁਰਸਿੱਖ ਕਹਿੰਦਾ ਨਹੀਂ ਨੇੜੇ ਜਾਂਦਾ ਉਹ ਸਮਝ ਲੈਂਦਾ ਨੂੰ ਬੇਟਾ ਦਾ ਠੀਕ ਹੈ ਜੀ ਅਸਲੀ ਸਿੱਖ ਨਹੀਂ ਆਏ ਜਾਂਦੇ ਨੇੜੇ ਇਹਨਾਂ ਨੂੰ ਘਾਹ ਗੇਲਦੇ ਇਹ ਲੋਕਾਂ ਨੂੰ ਉਹਨਾਂ ਨੂੰ ਸਮਝ ਐ ਵੀ ਇਹ ਵਾਲੇ ਹੋਏ ਆ ਦੂਰੇ ਹੋਏ ਨਾ असली ਜਿਹੜੇ ਨੇ ਸਮਝਦੇ ਨਹੀਂ ਉਹ ਇਹਨਾਂ ਦੇ ਦੂਰੇ ਰਹਿੰਦੇ ਉਹਨਾਂ ਨੂੰ ਪਤਾ ਵੀ ਕਾਦੇ ਜੋਗੇ ਨਹੀਂ ਕੀ ਕਰ ਰਹੇ ਹਨ ਅਖਲੀ ਵੀ ਹੈਗੇ ਥੋੜੇ ਦੇ ਪਰ ਉਹਨੀਆਂ ਦੇ ਨੇੜੇ ਆਉਂਦੇ ਹਾਂਜੀ ਬ੍ਰਹਮ ਵਿਚਾਰ ਨਾਨਕ ਆਖ ਸੁਣਾਵੇ ਜੇ ਬਿਨ ਸਤਗੁਰ ਕੇ ਮਨ ਮੰਨੇ ਕੰਮ ਕਰਾਏ ਸੋ ਜੰਤ ਮਹਾ ਦੁਖ ਪਾਵੇ ਇਹ ਗੱਲ ਬ੍ਰह्म ਦੀ ਵਿਚਾਰ ਕਰ ਰਿਹਾ ਆ ਨਾਨਕ ਬ੍ਰह्मਚਾਰ ਨਾਮ ਨੂੰ ਸੁਣਾਵੇ ਪਿੰਨ ਸਾਧੁਰ ਕੇ ਬੰਦੇ ਜੋ ਜਨਤ ਕਮ ਕਰਾਵੇ ਜਿਹੜੇ ਕੰਮ ਨੂੰ ਸਤਗੁਰ ਨਾਮ ਹੋਵੇ ਉਹ ਕੰਮ ਘਰਾਵੇ ਸੰਤ ਤੋਂ ਜਿਹੜਾ ਆਦਮੀ ਉਹ ਮਾ ਦੁੱਖ ਪਾਊਗਾ ਅਰਗਾਜ ਜਾ ਕੇ ਅੱਗੇ ਵਾਸਤੇ ਉਹਨੂੰ ਆ ਬਿਲੂਗਾ ਉਹਦਾ ਜਿਹੜਾ ਫਲ ਹੈ ਮਾ ਦੁੱਖ ਮਿਲੂਗਾ ਸੁਖ ਦੀ ਮਿਲਣਾ ਠੀਕ ਹੈ ਜੀ ਬ੍ਰਹਮ ਵਿਚਾਰ ਹੈ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਜਿਹੜੀ ਵਿਚਾਰ ਹੈ ਉਹ ਗੱਲ ਦੱਸ ਰਹੇ ਨੇ ਆਪਣੇ ਕੋਲੋਂ ਕੁਝ ਦੀ ਦੱਸ ਰਹੇ ਠੀਕ ਹੈ ਜੀ ਜੋ ਦਰਗਾਹ ਦੇ ਵਿੱਚ ਬ੍ਰਹਮ ਵਿਚਾਰ ਦੀ ਗੱਲ ਆ ਨਾ ਬਸ਼ਵਰਾ ਉਹਨਾਂ ਦਾ ਬ੍ਰਹਮ ਗਿਆ ਬੇਤੇਆਂ ਦਾ ਦਰਗਾਹ ਦੇ ਵਿੱਚ ਇਹ ਆਰਡਰ ਹੈ ਉਹ ਮਹਾਦੁਖ ਪਾਊਗਾ ਜਿਹੜਾ ਹਜੇ ਕਬੂਲ ਆਊਗਾ ਲੋਕਾਂ ਨੂੰ ਕਿਉਂ ਅਸਲੀ ਟੀਕੇ ਤੋਂ ਉਹਨਾਂ ਨੂੰ ਖਾੜਦਾ ਉਹਦੇ ਗੁਰਮਤ ਗ੍ਰੈਂਡਾਈਟੇ ਚੋਂ ਉਖਾੜ ਕੇ ਦੂਹੇ ਰਾ ਲੈ ਕੇ ਗਿਆ ਹੋਇਆ ਅਪਰਾਧੀ ਆ ਠੀਕ ਹੈ ਜੀ ਇਹ ਦੂਹੇ ਟੀਚੇ ਦੇ ਨਾਲ ਨਾਲ ਕੰਮ ਕਰਾ ਲੈਦਾ ਨਾ ਹੋਰ ਕੋਈ ਥੋੜਾ ਕੇ ਜਿਵੇਂ ਗੁਰੂ ਘਰ ਚ ਹੁੰਦਾ ਸੀ ਪਹਿਲਾਂ ਬ੍ਰਹਮਚਾਰ ਦੀ ਗੱਲ ਦੱਸਣੀ ਹੈ ਨਾਲ ਥੋੜਾ ਬਹੁਤਾ ਹੋਰ ਕੰਮ ਕਰਿਆ ਵੀ ਕਰ ਲੀ ਲੰਗਰ ਵੀ ਪਕਾਉਣਾ ਘੋੜਿਆਂ ਦੇ ਪੱਠੇ ਵੀ ਉਹ ਸੈਕਟਰੀ ਗੱਲ ਹੈ। ਸ਼ਰੀਰ ਵੀ ਹੈ ਉਹਦੇ ਖਾਤੇ ਰੋਟੀ ਪਾਣੀ ਦਾ ਇੰਤਜ਼ਾਮ ਵੀ ਕਰਨਾ। ਉਹ ਸੈਕਟਰੀ ਗੱਲ ਹੈ ਇਹਨਾਂ ਨੇ ਤਾਂ ਪਹਿਲੇ ਦੱਬਰ ਤੇ ਹੀ ਰੱਖਿਆ ਹੋਇਆ ਹੈ ਬਈ ਪਹਿਲੇ ਨੰਬਰ ਤੇ ਹੀ ਕਾਰਵਾਈ ਰੱਖੀ ਹੋਈ ਹੈ ਦੂਆ ਤਾਂ ਕੈਪਟਨ ਛਡਾਤਾ। ਅਸਲੀ ਕੈਪਟਨ ਛਡਾਤਾ ਅਪਰਾਧੀ ਤਾਂ ਨਹੀਂ। असली चैप्टर ਵੱਲ जाने नहीं ਨਹੀਂ ਦਿੰਦੇ ਕਿਸ ਦਾ ਧਿਆਨ ਜੇ ਚਲੇ ਗਏ ਉਹਨਾਂ ਨੇ ਇਹ ਦੂਸਰਾਂ ਦੀ ਕੁਝ ਵੀ ਇਹਨਾਂ ਦੀ ਆਪਣੀ ਜਿੱਦ ਨਹੀਂ ਰਹਿਣੀ ਇਸ ਕਰਕੇ ਧੀਏ ਲੋਕ ਹਾਂਜੀ ਕੌੜੀ ਤੂੰ ਸੱਚਾ ਸਾਹਿਬ ਅਤ ਵੱਡਾ ਤੂੰ ਹੈ ਜਿਵੜ ਤੋਂ ਵੱਡ ਵੱਡੇ ਲੇਖਾ ਛੱਡ ਦੇ ਸਾਰਾ ਆ ਹੱਥ ਵੱਡਾ ਹੱਥ ਵੱਡਾ ਹੋਣਾ ਜੀ ਤਾਂ ਵੱਡਾ ਕੋਈ ਹੋ ਗਈ ਨਾ ਪ੍ਰਤਿਆਪਤ ਵੱਡਾ ਕੋਈ ਤੇਰੇ ਬੰਦਾ ਤੇਰੇ ਬਰਾਬਰ ਦਾ ਨਹੀਂ ਕੋਈ ਠੀਕ ਵੱਡੇ ਤੋਂ ਵੱਡਾ ਤੂੰ ਜਿਸ ਤੂੰ ਮਿਲੈ ਸੋ ਤੁਦ ਮਿਲੈ ਜਿਸ ਨੂੰ ਤੂੰ ਮਿਲਨੇ ਉਹ ਤੈਨੂੰ ਮਿਲ ਸਕਦਾ ਤੇਰੀ ਆਗਿਆ ਤੋਂ ਬਿਨਾ ਕੋਈ ਨਹੀਂ ਤੈਨੂੰ ਮਿਲ ਸਕਦਾ ਦੇਖੋ ਅਸੀਂ ਆਪਣੀ ਆਗਿਆ ਨਾਲ ਅੱਧ ਹੋ ਸਕਦੇ ਆ ਆਪਣੇ ਮਰਜ਼ੀ ਨਾਲ ਅੱਡ ਹੋ ਸਕਦੇ ਆ ਆਪਣੀ ਮਰਜ਼ੀ ਤੋਂ ਮਿਲ ਨਹੀਂ ਸਕਦੇ ਤੂੰ ਆਪੇ ਬਖਸ਼ ਲੈ ਲੇਖਾ ਛੱਡ ਤੂੰ ਆਪੇ ਬਖਸ਼ ਦਿੰਦਾ ਲੇਖਾ ਛੱਡ ਦਿੰਦਾ ਜੋ ਅਸੀਂ ਅਪਰਾਧ ਕੀਤੇ ਨੇ ਨਾ ਉਹਨਾਂ ਦੇ ਕਲਪ ਫੇਰ ਦਿੰਦਾ ਮਾਫ ਕਰ ਦਿੰਦਾ ਲੇਖਾ ਛੱਡ ਦਿੰਦਾ ਤਾਂ ਮਿਲ ਮਰਜ਼ੀ ਤੇਰੀ ਹੋਈ ਨਾ ਲੇਖਾ ਛੱਡਣਾ ਲੇਖਾ ਛੱਡ ਦਿੰਦਾ ਮਿਲ ਆ ਠੀਕ ਹੈ ਜਿਸ ਨੂੰ ਤੂੰ ਆਪ ਮਿਲਾਏਂਦਾ ਤੋ ਸਤਗੁਰ ਸੇਵੇ ਮਨ ਗੱਡ ਗੱਡੇ ਜਿਸ ਨੂੰ ਤੋ ਆਪ ਲਾਇਂਦਾ ਵਿਸ਼ਾਨੀ ਕੀ ਹੈ ਜਿਹਨੂੰ ਮਲਾਉਣਾ ਹੁੰਦਾ ਤਾਂ ਪਹਿਲਾਂ ਦਿਖਾ ਦੇਗੀ ਉਹ ਸਤਪੁਰ ਨੂੰ ਸੇਵਦਾ ਗੱਡ ਕੇ ਕਿਤੋਂ ਬੋਲ ਗੱਡਣ ਸੇਵਦਾ ਉਹ ਪੈਰ ਗੱਡ ਕੇ ਸੇਵਦਾ ਉਹ ਦੋਏ ਪੈਰੇ ਕਤੋਂ ਡੜ ਦਦਾ ਤੂੰ ਪਾ ਵੈਂਦੇ ਜੀ ਪੈਰ ਕੋਰੇ ਜੇ ਦੋਏ ਪੈਰੇ ਕਤੋਂ ਵੱਡਦੀਏ ਕੇ ਰਹਿ ਗਿਆ ਦੋਏ ਪੈਰੇ ਗੱਡ ਕਹਿੰਦੇ ਨੇ ਗੱਡਾ ਤੋਏ ਨੂੰ ਅੱਛਾ ਜੀ ਤੋਏ ਲੈਂਦਾ ਮੈਂ ਨਹੀਂ ਹੈਗਾ ਵੀ ਬਾਜ ਵੀ ਤੇ ਨਾ ਹੋ ਜਾਂਦਾ ਗੱਡੇ ਗਏ ਇੱਦਾਂ ਨਹੀਂ ਗੱਡੇ ਗੱਡ ਗੱਡੇ ਗੱਡੇ ਵਿੱਚ ਗੱਡੇ ਅੱਛਾ ਪਹਿਲਾ ਗੱਡ ਨਹੀਂ ਹੈ ਪਹਿਲਾ ਗੱਡ ਹੈ ਗੱਡਾ ਖੱਡਾ ਹਾਂ ਹਾਂ ਖੱਡਾ ਪੱਟ ਕੇ ਵਿੱਚ ਬੈਠ ਗੱਡਦਾ ਨਿਕਲ ਵੀ ਨਹੀਂ ਫੇਰ ਕੱਢ ਲਵੇ ਕਿਵੇਂ ਬਾਹਰ ਗੱਡੇ ਤਾਂ ਪੈਰ ਜਿਹੜੇ ਖੜੇ ਕੀਤੇ ਜਲਮਲ ਦੀ ਹੱਲ ਹੋ ਜਾਂਦਾ ਨੇ ਫੇਰ ਨਹੀਂ ਆ ਦੁੱਧ ਖੱਡਾ ਪੱਟ ਕੇ ਉਹਦੇ ਵਿੱਚ ਗੱਡੇ ਹੋਏ ਉਹਦੇ ਵਿੱਚ ਗੱਡੇ ਨੇ ਖੱਡਾ ਪੱਟ ਕੇ ਗੋਲਿਆਂ ਤੱਕ ਠੀਕ ਹੈ ਤੂੰ ਸੱਚਾ ਸਾਹਿਬ ਸੱਚ ਤੂੰ ਸਭ ਜਿਉ ਪਿੰਡ ਚੰ ਮੇਰਾ ਹੱਡੇ ਤਾਂ ਮੂੰਹ ਹੱਗ ਜਿਉ ਪਿੰਡ ਉਹ ਤੇਰਾ ਹੀ ਆ ਬਾਰਾਂ ਵੇ ਤੂੰ ਆਇਆ ਫਿਰ ਜੇ ਤੇਰਾ ਨਹੀਂ ਤਾਂ ਕਿਦੋਂ ਬਾਰੋਂ ਜੇ ਬਾਰੋਂ ਆਇਆ ਤਾਂ ਉਹਦਾ ਮਾਲਕ ਵੀ ਕੋਈ ਹੋਰ ਹੋਊ ਇਆ ਕਿ ਤੂੰ ਦਾਣਾ ਹੋ ਕਿਸੇ ਦਾ ਕੁਝ ਨਹੀਂ ਸਭ ਤੇਰਾ ਹੀ ਹੈ ਜਿਉ ਭਾਵੈ ਤਿਉ ਰਖ ਤੂੰ ਸੱਚਾ ਨਾਨਕ ਮਨ ਆਸ ਤੇਰੀ ਵੱਡ ਵੱਡੇ ਇਹ ਵੱਡ ਵੱਡੇ ਨਾਨਕੁ ਤੇਰੀ ਆਸ ਮੇਰਾ ਹੈਗਾ ਰਖਣਾ ਰਹਿਣ ਦਾ ਇੱਛਾ ਜੱਬਣ ਮਰਜੀ ਸ਼ਰਤ ਮੇਰੀ ਕੋਈ ਨਹੀਂ ਵੀ ਐਸ ਤਰੀਕੇ ਨਾਲ ਰਖ ਤਰੀਕਾ ਤੇਰਾ ਇੱਛਾ ਮੇਰੀ ਬੇਰੀ ਇੱਛਾ ਤੇਰੀ ਡਾਕਟਰ ਦੀ ਜਿਹੜੀ ਦਵਾਈ ਦਮ ਬੈਡ ਰੈਸਟ ਕਹਿੰਦੇ ਬੈਡ ਰੈਸਟ ਤੇ ਪਿਆ ਰਹੂੰ ਉਠਾ ਲੜਕਾ ਟੁਕਾ ਉਠਾ ਲੜਕੀ ਜਾਊ ਮਰਜ਼ੀ ਦੇ ਦੀਨਾ ਚੱਲੂਗਾ ਨਾਨਕ ਮਨ ਆਸ ਤੇਰੀ ਵੱਡ ਵੱਡੇ ਤੇਰੀ ਆਸ ਹੈ ਵੱਡ ਵੱਡੇ ਵੱਡ ਵੱਡੇ ਤੇਰੀ ਆਸ ਹੈ ਤੇਰੇ ਤੇ ਆਸਾ ਪੂਰੀ ਜ਼ਰੂਰ ਹੋਊਗੀ ਠੀਕ ਹੈ ਜੀ